ਇਹ ਗੱਲ ਦੱਸ ਭਈਆ ਜਿਹੜੇ ਦੇਵਤੇ ਕੋਈ ਬ੍ਰਹਮਾ ਦੀ ਪੂਜਾ ਕਰਦਾ ਕੋਈ ਸਰਸਵਤੀ ਦੀ ਕਰਦਾ ਕੋਈ ਵਿਸ਼ਨੂੰ ਦੀ ਕਰਦਾ ਕੋਈ ਗਣੇਸ਼ ਦੀ ਪੂਜਾ ਕਰਦਾ ਤੇਰਾ ਕੀ ਖਿਆਲ ਹੈ ਇਹਨਾਂ ਦੇਵਤਿਆਂ ਬਾਰੇ ਤੂੰ ਵੀ ਕਿਸੇ ਦੇਵਤੇ ਨੂੰ ਮੰਨਦਾ ਹਨੂਮਾਨ ਕਹਿੰਦਾ ਮੈਂ ਇਹਨਾਂ ਦੇ ਨਾਮ ਤੇ ਜ਼ਰੂਰ ਸੁਣੇ ਨੇ ਪਰ ਮੇਰੀ ਇਹਨਾਂ ਨਾਲ ਪਛਾਣ ਕੋਈ ਨਹੀਂ ਹਨੂਮਾਨ ਨੇ ਹਨੂਮਾਨ ਨਾਟਕ ਵਿੱਚ ਜਵਾਬ ਦਿੱਤਾ ਕਹਿੰਦਾ ਕਾਹੂ ਕੋ ਸਾਰ ਸੁਤੀ ਵਰਪੂਰਣ ਕਾਹੂ ਕੋ ਹੈ ਸਿਵ ਸੇ ਵਰਦਈਆ ਕਾਹੂ ਕੋ ਹੈ ਚਤਰਾਨਨ ਕੋ ਬਲ ਕਾਹੂ ਗਜਾਨਨ ਆਸ ਬਸਈਆ ਕਾਨ ਸੁਨੇ ਪਹਿਚਾਨ ਨਾ ਕਾਹੂ ਸੋ ਸਾਚ ਕਹ ਕਬ RAM ਕਹੀਆ ਜਾਣਤ ਸ੍ਰੀ ਰਗਵੀਰ ਕਾ ਨਾਮ ਹੈ ਜਾਂ ਸੁਣੀਏ ਸਭ ਹੋਏ ਸਹਈਆ ਇੱਕ ਭਗਵਾਨ ਰਾਮਚੰਦਰ ਦੇ ਨਾਮ ਤੋਂ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਮੇਰੀ ਉਹਦੇ ਤੇ ਪ੍ਰਤੀਤ ਬਣੀ ਹੋਈ ਹੈ ਉਹਦਾ ਨਾਮ ਲੋਕ ਤੇ ਪਰਲੋਕ ਵਿੱਚ ਸਹਾਇਤਾ ਕਰਦਾ ਇਸ ਵਾਸਤੇ ਮੇਰੀ ਉੱਥੇ ਪ੍ਰਤੀਤ ਹੈ ਮੈਂ ਇਹਨਾਂ ਦੀ ਪਹਿਚਾਣ ਨਹੀਂ ਹੋਈ ਮੈਨੂੰ ਮੈਂ ਹੋਰ ਕਿਸੇ ਨੂੰ ਪਹਿਚਾਣਦਾ ਹੀ ਨਹੀਂ ਐਸੇ ਬਲੁਖਾ ਵਾਸਤੇ ਸਤਿਗੁਰਾਂ ਨੇ ਕਹਿ ਦਿੱਤਾ ਜਾਂਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀ ਹਰ ਦੇ ਵਿੱਚ ਰਾਮ ਵਸ ਗਿਆ ਸੀ ਉਹਦੇ ਵਿੱਚ ਇਸ ਵਾਸਤੇ ਕਿ ਗੁਰੂ ਤੇ ਪ੍ਰਤੀਤ ਸੀ ਨਾਮ ਧਾਰੀ ਕੇਂਦਰ ਸ੍ਰੀ ਪੈਣੀ ਸਾਹਿਬ ਦੇ ਅੰਦਰ ਇੱਕ ਵਾਰੀ ਮਸਤਾਂ ਦਾ ਮਸਤਾਨਿਆਂ ਦਾ ਜਥਾ ਪੜ ਰਿਹਾ ਸੀ ਸ਼ਬਦ ਆਪੋ ਵਿੱਚ ਬੈਠੇ ਹੋਏ ਸਨ ਸ਼ਬਦ ਪੜਦੇ ਪਏ ਸਨ ਉੱਚੀ ਉੱਚੀ ਤਾਰਨਗੇ ਅਤੀਤ ਸਤਗੁਰ ਤਾਰਨਗੇ ਐਸਾ ਕੋਈ सिंह ਪੜਦੇ ਪਏ ਸਨ ਸਤਗੁਰੂ ਰਾਮ खलो ਸੱਚੇ ਪਾਤਸ਼ਾਹ ਲੰਘਦੇ ਪਏ ਸਨ ਖਲੋ ਕੇ ਸੁਣਿਆ ਤੇ ਸੁਣ ਕੇ ਉਹਨਾਂ ਨੂੰ ਜਵਾਬ ਦਿੱਤਾ ਹੁਕਮ ਕੀਤਾ ਹੁਣ ਪੜਿਆ ਕਰੋ ਤਾਰੂਗੀ ਪਰਤੀਤ ਇਸ ਜਮਾਨੇ ਵਿੱਚ ਪਰਤੀਤ ਤਾਰੇਗੀ ਸਤਕਰੂ ਰਾਮ ਸਿੰਘ ਜੀ ਦਾ ਹੁਕਮ ਹੈ ਮੈਂ ਜਸ ਜੀਵਨ ਵਿੱਚੋਂ ਇੱਕ ਹੋਰ ਕਥਾ ਪੜੀ ਸਾਡੇ ਸੰਤਨਗਰ ਵਿੱਚ ਰਹਿਣ ਵਾਲੇ ਸੰਤ ਗੁਰਦੇਵਾਲ ਸਿੰਘ ਜੀ ਦਿੱਲੀ ਰਹਿੰਦੇ ਉਹਨਾਂ ਨੇ ਦੱਸਿਆ ਮੈਨੂੰ ਸੰਤਨਗਰ ਦੇ ਵਿੱਚ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਅਸੀਂ ਆਏ ਇਸ ਇਲਾਕੇ ਵਿੱਚ ਇੱਥੇ ਕਥਾ ਹੁੰਦੀ ਹੁੰਦੀ ਸੀ ਫਰੀਦ ਜੀ ਕਥਾ ਕਰਦੇ ਹੁੰਦੇ ਸਨ ਮੇਰਾ ਖਿਆਲ ਉਹਨਾਂ ਦਾ ਅਸਲੀ ਨਾਮ ਸੁੰਦਰ ਸਿੰਘ ਹੈ ਸੁੰਦਰ ਸਿੰਘ ਜੀ ਫਰੀਦ ਤੇ ਫਰੀਦ ਫਰੀਦ ਕਰਕੇ ਹੀ ਉਹਨਾਂ ਨੂੰ ਕਹਿੰਦੇ ਸਨ ਬੜੀ ਉੱਚੀ ਵਰਤੀ ਦੇ ਸਾਧੂ ਸਨ ਕਥਾ ਕਰਿਆ ਕਰਦੇ ਸਨ ਸਤਗੁਰੂ ਬਿਲਾਸ ਦੀ ਜਿਹਦੇ ਵਿੱਚ ਸਤਗੁਰੂ ਰਾਮ ਸਿੰਘ ਜੀ ਦਾ ਇਤਿਹਾਸ ਹੈ ਤੇ ਸਤਗੁਰੂ ਰਾਮ ਸਿੰਘ ਜੀ ਦੀ ਕਥਾ ਕਰਦਿਆਂ ਕਰਦਿਆਂ ਉਹਨਾਂ ਦੀ ਸ਼ਰਧਾ ਇੰਨੀ ਸੀ ਸਤਗੁਰਾਂ ਤੇ ਇਹੋ ਸਤਗੁਰੂ ਰਾਮ ਸਿੰਘ ਨਾਮ ਕਰਕੇ ਨਹੀਂ ਸੜ ਕਹਿੰਦੇ ਜਦੋਂ ਕਿਤੇ ਕਥਾ ਕਰਦੇ ਆ ਦਾ ਕੋਈ ਕੌਤਕ ਦੱਸਣਾ ਤੇ ਆਖਣਾ ਵੱਡੇ ਸਤਗੁਰ ਇਸ ਤਰ੍ਹਾਂ ਕਰਦੇ ਸੜ ਸਤਗੁਰੂ ਰਾਮ ਸਿੰਘ ਜੀ ਨੂੰ ਉਹ ਵੱਡੇ ਸਤਗੁਰ ਕਹਿੰਦੇ ਸੜ ਆਪਣੀ ਸ਼ਰਦਾ ਦੀ ਗੱਲ ਹੈ ਉਹਨਾਂ ਦੀ ਬਣੀਓ ਇਸੀ ਪ੍ਰਤੀਤ ਜਦੋਂ ਬੋਲਣਾ ਜਦੋਂ ਵੀ ਕਥਾ ਕਰਨੀ ਵੱਡੇ ਸੱਚੇ ਪਾਤਸ਼ਾਹ ਇੱਥੇ ਗਏ ਵੱਡੇ ਸਤਿਗੁਰੂ ਜੀ ਉੱਥੇ ਗਏ ਵੱਡੇ ਸਤਿਗੁਰਾਂ ਨੇ ਇਹ ਕੰਮ ਕੀਤਾ ਵੱਡੇ ਸਤਿਗੁਰਾਂ ਨੇ ਐਉਂ ਕੀਤਾ ਇਸ ਤਰ੍ਹਾਂ ਕਥਾ ਕਰਦੇ ਸਾਨੂੰ ਤੇ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਅਨੰਨ ਸੇਵਕ ਸੰਤ ਕਿਧਾਰਾ ਸਿੰਘ ਇਹ ਕਥਾ ਵਿੱਚ ਬੈਠਾ ਹੁੰਦਾ ਸੀ ਇਹਨੂੰ ਪ੍ਰਤੀਤ ਸੀ ਪ੍ਰਤੱਖ ਸਤਿਗੁਰੂ ਤੇ ਇਹਦਾ ਅਕੀਦਾ ਇਹ ਸੀ ਕਿ ਜਿਹੜਾ ਪ੍ਰਤੱਖ ਤੇ ਪ੍ਰਤੀਤ ਨਹੀਂ ਤੇ ਫਿਰ ਕਿਸੇ ਤੇ ਵੀ ਪ੍ਰਤੀਤ ਨਹੀਂ ਇਸ ਨੇ ਉੱਠ ਕੇ ਇੱਕ ਦਿਨ ਕਹਿ ਦਿੱਤਾ ਸੰਤਾਂ ਨੂੰ ਫਰੀਦੁਰਾਨ ਫਰੀਦ ਜੀ ਤੁਸੀਂ ਕਥਾ ਤੇ ਬਹੁਤ ਸੁੰਦਰ ਕਰਦੇ ਹੋ ਕਥਾ ਕਰੋ ਬੇਸ਼ੱਕ ਹੋਣੀ ਚਾਹੀਦੀ ਹੈ ਸਤਗੁਰੂ ਰਾਮ ਸਿੰਘ ਜੀ ਦਾ ਇਤਿਹਾਸ ਜਰੂਰ ਤੁਸੀਂ ਪੜ੍ਹਦੇ ਹੋ ਪਰ ਇੱਕ ਕੰਮ ਕਰੋ ਤੁਸੀਂ ਵੱਡੇ ਸਤਗੁਰ ਨਾ ਆਖੋ ਤੁਸੀਂ ਕਥਾ ਕਰਨੀ ਹੈ ਤੇ ਰਾਮ ਸਿੰਘ ਦਾ ਨਾਮ ਲੈ ਕੇ ਆਖੋ ਬਈ ਸਤਗੁਰੂ ਰਾਮ ਸਿੰਘ ਜੀ ਫਰਾਨੇ ਥਾ ਗਏ ਉਹਨਾਂ ਨੇ ਇਹ ਕੀਤਾ ਉਹ ਕੀਤਾ ਉਪਦੇਸ਼ ਦਿੱਤਾ ਨਾਮ ਜਪਾਇਆ ਸਤਗੁਰੂ ਰਾਮ ਸਿੰਘ ਜੀ ਦਾ ਨਾਮ ਲੈ ਕੇ ਗੱਲ ਕਰੋ ਵੱਡੇ ਸਤਗੁਰੂ ਨੇ ਆਖੋ ਉਹਨਾਂ ਨੇ ਆਖਿਆ ਤੈਨੂੰ ਇਹਦੇ ਨਾਲ ਤਕਲੀਫ ਕੀ ਏ ਉਹਨਾਂ ਆਖਿਆ ਮੈਨੂੰ ਇਹ ਤਕਲੀਫ ਹੈ ਬਈ ਵੱਡੇ ਸਤਗੁਰੂ ਆਖਿਆ ਮੇਰਾ ਸਤਗੁਰੂ ਪ੍ਰਤਾਪ ਸਿੰਘ ਛੋਟਾ ਹੋ ਜਾਂਦਾ ਪਰ ਤਖਤੇ ਪ੍ਰਤੀਤ ਸੀ ਆਖੇ ਮੈਂ estrani ਆਖਣ ਦੇਣਾ ਥੋੜੀ ਜੀ ਗੱਲ ਚਰਚਾਏ ਦੀ ਵਧ ਵੀ ਗਈ ਸੰਤਾ ਗੁਰਦਾਰਾ ਸਿੰਘ ਉਹਨਾਂ ਨੇ ਦੱਸਿਆ ਕਿ ਅੜ ਕੇ ਖਲੋ ਗਿਆ ਸੀ ਉਹਨਾਂ ਆਖਿਆ ਮੈਂ ਇਸ ਤਰ੍ਹਾਂ ਕਥਾ ਹੀ ਨਹੀਂ ਹੋਣਦਿਆਂਗਾ ਮੇਰਾ ਸਤਿਗੁਰੂ ਪ੍ਰਤਾਪ ਸਿੰਘ ਛੋਟਾ ਹੁੰਦਾ ਇਸ ਤਰ੍ਹਾਂ ਤੁਸੀਂ ਸਤਿਗੁਰੂ ਰਾਮ ਸਿੰਘ ਦਾ ਨਾਮ ਲੈ ਕੇ ਕਥਾ ਕਰੋ ਮੈਂ ਅਰਜ ਕਰ ਰਿਹਾ ਸਾਂ ਪ੍ਰਤੱਖ ਤੇ ਪ੍ਰਤੀਤ ਜਿੰਨਾ ਦੀ ਬਣ ਗਈ ਆ ਉਹਨਾਂ ਦੇ ਸਾਰੇ ਕਰਮ ਸਫਲ ਹੋ ਜਾਂਦੇ ਨੇ ਸੰਸਾਰ ਵਿੱਚ ਐਸਾ ਹੈ ਇਸੇ ਵਾਸਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਜਾਗ ਕੈ ਮਨ ਗੁਰ ਪ੍ਰਤੀਤ ਿਸ ਜਨ ਆਵੇ ਹਰ ਪ੍ਰਭ